लोक महला तीजा ओवा पंडित ज्योति की वेद पढ़ा मुख चार नवखंड मदे पूज्या अपने चज विचार बड़ा पंडित ओवा ज्योति वेद मुख जीवनी याद हुन वेद पढ़ मुख चार नाब कर मदे पूज्या ਮੂਰਤ ਕਰਨਾਂ ਦੀ ਸਾਡੀ ਧਰਤੀ ਤੇ ਮੇਰੀ ਪੂਜਾ ਹੋਵੇ ਤੁਸੀਂ ਚੰਗਾ ਸੁਭਜਣ ਮੈਨੂੰ ਇੱਜ਼ਤ ਹੋਵੇ ਜੀ ਆਪਰੇ ਚਾਰੇ ਵਿਚਾਰ ਆਪਣੇ ਅਧਿਆਨ ਕਰਕੇ ਆਪਣੇ ਸੁਭਾਅ ਕਰਕੇ ਕਰਕੇ ਮੈਂ ਸਾਡੀ ਦੁਨੀਆ ਔਰ ਜੋਤਿਸ਼ੀ ਚ ਕੀ ਫਰਕ ਹੁੰਦਾ ਜੀ ਜੋਤਿਸ਼ੀ ਉਹ ਤਾਂ ਵਾਲਾ ਪੰਡਤ ਉਹ ਤਾਂ ਪੜਿਆ ਆ ਅੱਛਾ ਮਤ ਸੱਚਾ ਅਖਰ ਭੁੱਲ ਜਾਏ ਚੌਂਕੇ ਪਟੇ ਨ ਕੋਈ ਝੂਠੇ ਚੌਂਕੇ ਨਾਨਕਾ ਸੱਚਾ ਏਕੋ ਸੋਈ ਵਾਗਾ ਸੱਚਾ ਅਖਾਰ ਅਖਲ ਵੀ ਆ ਅਖਾਰ ਆ ਹੈ ਅੱਛਾ ਜੀ ਮਤ ਸੱਚਾ ਅਖਾਰ ਭੁੱਲ ਜਾਏ ਭੁੱਲ ਜਾਏ ਅਖਾਰ ਗੇਟ ਨਾ ਆਪਣਾ ਮੂਲ ਭੁੱਲ ਗਿਆ ਅਖਾਰ ਜੋ ਤ ਅਖਾਰ ਤੈਨੂੰ ਆਪਣਾ ਜੇ ਮੂਲ ਭੁੱਲ ਗਿਆ ਵਾਤ ਸੱਚਾ ਅਖਾਰ ਭੁੱਲ ਜਾਏ ਮੈਨੂੰ ਸੱਚਾ ਅਖਾਰ ਦੀ ਭੁੱਲਣਾ ਚਾਹੀਦਾ ਆਪਣੇ ਬੋਲ ਨੇ ਕੋਲ ਨਹੀਂ ਜਾਇਦਾ ਬੋਲ ਨੇ ਜੁੜਿਆ ਰਹਿਣਾ ਚਾਹੀਦਾ ਚੌਕਾ ਪਿੱਛੇ ਤੇ ਤੇਰਾ ਚੌਕਾ ਕੋਈ ਨਹੀਂ ਪਿੱਟ ਸਕਦਾ ਜੋ ਪਰਜੀ ਖਾਈ ਜਾ ਕੋਈ ਪੱਟਿਆ ਨਹੀਂ ਜਾਣਦਾ ਤੂੰ ਕਹਿ ਤੌਕੇ ਨਾਲ ਸੱਚਾ ਇੱਕੋ ਹੋਵੇ ਬਾਕੀ ਤੂੰ ਚੌਕੇ ਜਿਹੜੇ ਬਾਹਰ ਤੋਂ ਚੋਟੇ ਹੁੰਦੇ ਸੱਚਾ ਇੱਕੋ ਹੀ ਅੰਦਰ ਅੰਦਰ ਵਾਲੇ ਨਾਲ ਜੁੜਿਆ ਹੋਇਆ ਤਾਂ ਸੱਚਾ ਸੱਚਾ ਹੈ ਅੰਦਰ ਵਾਲੇ ਨਾਲ ਜੁੜਿਆ ਨਹੀਂ ਹੋਇਆ ਬਾਹਰੋਂ ਜਿੱਲੇ ਕੋਈ ਚੌਕੇ ਤੇ ਖਾਈਗਾ ਝੂਠੇ ਦਾ ਆਏ ਜੂਠੇ ਜਾਣ ਵੀ ਜੂਠੇ ਜੂਠੇ ਬਰੇ ਆਪਾਂ ਕੇ ਆਇਆ ਹੈ ਝੂਠੀ ਪਰ ਜੂਠੀ ਆਇਆ ਸਿੱਧੀ ਹੋਈ ਨਹੀਂ ਸਕਦੀ ਆਇਆ ਦਾ ਦੇਖਾ ਹੋ ਜੀ ਜੇ ਮੂਲ ਨਾਲ ਜੁੜਿਆ ਹੋਇਆ ਚੌਕਾ ਸੱਚਾ ਜੇ ਮੂਲ ਤੋਂ ਟੁੱਟ ਗਿਆ ਫਿਰ ਚੌਕੇ ਸਾਰੇ ਝੂਠੇ ਹੋ ਗਏ ਹਾਂ ਜੀ ਠੀਕ ਹੈ ਜੀ ਮਹੱਲਾ ਤੀਜਾ ਆਪ ਉਪਾਏ ਕਰੇ ਆਪੇ ਨਜ਼ਰ ਕਰੇ ਆਪੇ ਦੇ ਵਡਿਆਈਆਂ ਕਹੋ ਨਾਨਕ ਸੱਚਾ ਸੋਏ ਮੂਲ ਆਪ ਹੈ ਆਪ ਕਰਦਾ ਹੈ ਆਪੇ ਉਹਨੂੰ ਕਰਦਾ ਕਰਦਾ ਕਰਦਾ ਪਰਮੇਸ਼ਰ ਜਿਹੜਾ ਕੋਈ ਸੇ ਪੈਦਾ ਕਰਦਾ ਸਾਰਿਆਂ ਤੇ ਜੀਤ ਆਪਣੇ ਆਪ ਨੂੰ ਪੈਦਾ ਕਰਦਾ ਸਰ ਪੈਦਾ ਕਰਦਾ ਆਪੇ ਨਜ਼ਰ ਕਰੇ ਆਪੇ ਦੇ ਔਰ ਆਨਕ ਸੱਚਾ ਹੋਵੇ ਬੜਾਈ ਵੀ ਜਿੰਨੀ ਆਪੇ ਦਾ ਪਰਵੇਸ਼ਰ ਦੀ ਗੱਲ ਆ ਪਰਵੇਸ਼ਰ ਕਰਦਾ ਜਿਹਦੀ ਖੁਦ ਵੱਡੀ ਕਰਦਾ ਜਾਂ ਨਹੀਂ ਕਰਦਾ ਇਹ ਉਹਦੇ ਹੱਥ ਜਿਹੜਾ ਹੋਜੀਦਾ ਤੇ ਸਰੂਰੀ ਦਾ ਹਾਂਜੀ ਔੜੀ ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੂਝੇ ਆਫਰੇਉ ਜੱਗ ਮੈਂ ਵਰਤਦਾ ਆਪੀ ਸਿਓ ਲੁੱਝੇ ਜੇ ਕਾਲ ਕੱਟਦਾ ਤਾਂ ਇੱਕੋ ਹੀ ਇਹੋ ਕਰਨਾ ਹੁੰਦਾ ਨੇ ਅਮਰੀ ਦੂਜੇ ਕੱਟਦੇ ਵੀ ਇੱਕੋ ਹੀ ਹਕਮ ਮੈਂ ਵਰਤਦਾ ਉਹ ਜੱਗ ਜੀ ਖੁਦ ਵਰਤਦਾ ਆਫਰੇਉ ਕੋਈ ਬੇਕਾਬੂ ਹੋਇਆ ਉਹਦੇ ਕੋਈ ਹੱਥ ਦੀ ਬਾਤ ਨਹੀਂ ਫੜਿਆ ਨਹੀਂ ਹੋਇਆ ਕਿ ਲੱਗੇ ਕਿ ਕਾਬੂ ਜੀ ਨਹੀਂ ਆ بے قابو ہے ورتدا خدا کا۔ پاپ ہی سے رُجھے۔ جڑا پاپ ہی ہے۔ اُدے خلاف ورتدا حکم۔ جڑا حکم دے اُوں نوں تھلے اُدا اُنو نہیں کوئی۔ اُدے نوں ہور دے دا نہیں ہے۔ اور جڑا حکم دی خلاف ورتی کردا پاپ ہی ਜੋ ਮਨਸਿਕ ਜੁੱਝੇ ਗੁਰ ਸ਼ਬਦਿਆਂ ਤੇ ਜਿਹੜਾ ਗੁਰ ਸ਼ਬਦ ਹੈ ਗੁਰ ਉਪਦੇਸ਼ ਹੈ ਇਹਦੇ ਨਾਲ ਹਰ ਪੁੱਛਿਆ ਜਾਂਦਾ ਹੈ ਇਹਦੇ ਨਾਲ ਹਰ ਦਾ ਭੇਦ ਹੈ ਤੇ ਹਰ ਕੀ ਹੈ ਹਰ ਜਪ ਹਰ బుਝਾ ਹਰ ਨੂੰ ਸਮਝ ਕੇ ਹਰ ਬੁਝਿਆ ਜਾਂਦਾ ਸੋ ਹਰ ਸਨਾਈ ਚੁੱਤੀ ਹੈ ਉਹ ਹੀ ਆਰ ਦੀ ਛਾਲ ਚੱਲੇ ਨੇ ਜਿਹੜੇ ਹਰ ਦੀ ਛਾਲ ਜਿਹੜੇ ਉਹਨਾਂ ਦਾ ਹੀ ਸੁਤਕਾਰਾ ਹੁੰਦਾ ਅਰਦੀ ਛਾਲ ਜੇ ਸੁਤਕਾਰਾ ਹੈ ਕਿ ਸਰਬੀ ਹੈ ਜੇ ਜੋ ਬੰਦੇ ਆਪਣੇ ਕਰਦਾ ਆਪਣੇ ਬੰਦੂ ਨਾਲ ਝੜ ਕੇ ਬਰੂਦ ਹੈ ਹਰ ਜਾਂਦਾ ਕੋਈ ਫੇਰ ਚੜਕਾਰਾ ਹੁੰਦਾ ਠੀਕ ਹੈ ਜੀ ਮਨ ਨਾਲ ਜੂਝਣਾ ਪੈਂਦਾ ਫੇਰ ਹਰ ਦੀ ਸ਼ਰਨ ਜਾਂਦਾ ਨਹੀਂ ਮਨ ਨਾਲ ਮਨ ਵਿਚਾਰ ਹਰ ਜਪ ਕਰੇ ਹਰ ਦਰਗਹ ਸਿਜੇ ਮਨ ਵਿੱਚ ਵਿਚਾਰ ਮਨ ਨੂੰ ਵਿਚਾਰ ਕੇ ਮਨ ਵਿੱਚ ਵਿਚਾਰ ਕੇ ਹਰ ਜਪ ਕਰੇ ਹਰ ਨੂੰ ਜਪੇ ਹਰ ਜਪ ਦੇ ਵੀ ਅਰਥ ਸਾਫ ਹੋ ਜਾਂਦੇ ਹਨ ਜੀ ਹਾਂ ਠੀਕ ਹੈ ਜੀ ਇੱਥੇ 11ਵੀਂ ਪੌੜੀ ਦੀ ਸਮਾਪਤੀ